ਦੱਖਣੇ ਮਹਲਾ ਪੰਜਵਾਂ ਸੋ ਨਿਵਾਹੁ ਗੱਡ ਜੋ ਚਲਾਉ ਨਾ ਥੀਏ ਕਾਰ ਕੁੜਾ ਵੀ ਛੱਡ ਸੰਮਲ ਸੱਚ ਤਣੀ ਹਾਂਜੀ ਸੋ ਦੀਨ ਵਟ ਪੜਾਂਗੇ ਵਾਹੂ ਵਟ ਪੜਾਂਗੇ ਆਪਾਂ ਸੋ ਨਹੀਂ ਵਾਹੂ ਉਹ ਨਹੀਂ ਬਹੁਤਾ ਗੱਡਾ ਗੱਡੀ ਉਹ ਵੱਡਾ ਨਹੀਂ ਚਲਾ ਰਿਹਾ ਅਸਰੀਰ ਗੱਡਾ ਹੀ ਹੈ ਜੋ ਚਲਾਉ ਨਾ ਕੀਏ ਜਿਹੜਾ ਮਨ ਚਲਾਏ ਮਨ ਨਹੀਂ ਹੈ ਉਹ ਸਰੀਰ ਵੀ ਵਰਤਦਾ ਹੁੰਦਾ ਉਹ ਸਰੀਰ ਨਹੀਂ ਵਰਤਦਾ ਭਾਂਡੇ ਚੱਲਦਾ ਜਿਵੇਂ ਤੂੰ ਚਲਾਏ ਤੇ ਮੈਂ ਹੋ ਜਾਂਦਾ ਉਹ ਕਾਰਕੜਾ ਛੱਡ ਸਰੀਰ ਨਾਲ ਦਾ ਜੋ ਕਾਰਕੜੀ ਬੜਾ ਵੀ ਹੈ ਝੂਠੀ ਕਾਰ ਛੱਡ ਦਿੰਦਾ ਕੋੜਾ ਕਾਰ ਛੱਡ ਆਪਣੀ ਮਰਜ਼ੀ ਨਾਲ ਚੱਲਣਾ ਕਾਹਦੇ ਨੇ ਕੰਮ ਉਹ ਛੱਡ ਦਿੰਦਾ ਸੰਭਲ ਖਾਚ ਧੜੀ ਓ ਸੱჭ ਨੂੰ ਇਕੱਠਾ ਕਰਦਾ ਹੁੰਦਾ ਸੱჭ ਸੱჭ ਧੰਦ ਦਾ ਧਨਵਾਨ ਬਣਨ ਵਾਸਤੇ ਸੱჭ ਇਕੱਠਾ ਕਰਦਾ ਹੁੰਦਾ ਸੰਭਲ ਤੋਂ ਕੀ ਹੁੰਦਾ ਇਕੱਠਾ ਕਰਨਾ ਆਪਾਂ ਪੈਸਾ ਸੰਭਾਲਾਂਗੇ ਆਪੇ ਠੀਕ ਹੈ ਜੀ ਜੋ ਗੱਲ ਸੁਣ ਲਈ ਸਮਝ ਲਈ ਹਿਰਦੇ ਜਿੱਤੇ ਆਜੇ ਰੱਖ ਲਈ ਸੰਭਾਲ ਕੇ ਰੱਖ ਮਹੱਲਾ 5 ਅਬ ਸਮਾਣੀ ਜੋਤ ਜਿਉ ਜਲ ਘਟਾਉ ਚੰਦਰਮਾ ਥੀਆ ਆਪ ਨਾਨਕ ਮਸਤਕ ਲਿਖਿਆ ਅਬ ਸਮਾਣੀ ਜੋਤ ਸਾਰਿਆਂ ਦੇ ਜੋਸ ਮਾਈ ਹੋਈ ਹੈ ਨਹੀਂ ਪ੍ਰਮਾਣ ਦੱਸਦੇ ਅਸੀਂ ਨਾਵੰਦੇ ਕਹਿੰਦੇ ਜਿਵੇਂ ਲੱਕੜੀ ਘੜਿਆਂ ਦੇ ਵਿੱਚ ਪਾਣੀ ਪਾ ਦਈਏ ਭਰ ਦਈਏ ਨੂੰ ਪਾਣੀ ਨਾਲ ਨਾ ਪਰਿਏ ਚਲੋ ਥੋੜਾ ਉਹ ਤਾਂ ਵੀ ਹੋਵੇ ਸਾਰੇ ਘੜਿਆਂ ਚੰਦਰਮਾ ਚੰਦਰਮਾ ਪੂਰੇ ਦਾ ਪੂਰਾ ਹਰੇ ਘੜੇ ਦੇ ਪਾਣੀ ਚ ਦੇਖ ਲੋ ਆਪ ਸਬਾਣੀ ਜੋਤ ਜਿਉਂ ਜਲ ਘਟਾਉ ਇੰਦਰ ਵਜੋਂ ਚੱਲਦੇ ਘੜੇ 'ਚ ਪ੍ਰਗਟ ਕੀਆ ਆਪ ਆਨੰਤ ਕ ਬਸਤਕ ਲਿਖਿਆ ਪ੍ਰਗਟ ਅੰਦਰ ਹੋ ਜਾਂਦਾ ਜਿਹਦੇ ਪ੍ਰਗਟ ਕਰਨਾ ਮੰਨ ਲਿਆ ਹੋਵੇ ਜਿਹਦੇ ਲਿਖ ਲਿਆ ਹੋਵੇ ਨਾ ਆਪਣੇ ਅੱਗੇ ਬੋਲ ਲਾ ਲਿਆ ਹੋਵੇ ਵੀ ਬੇਦਰੋ ਪ੍ਰਗਟੇ ਕਰਨਾ ਹੋਰ ਕੁਝ ਕਰਨਾ ਹੀ ਨਹੀਂ ਉੱਪਰਲਾ ਕੰਮ ਛੱਡ ਦਿੱਤਾ ਹੋਵੇ ਗੱਡਾ ਚਲਾਉਣਾ ਬੰਦ ਕਰ ਦਿੱਤਾ ਹੋਵੇ ਤਜਰਾ ਗਿਆਨ ਇਕੱਠਾ करता ਹੋਵੇ ਉਹ ਪ੍ਰਗਟ ਵੀ ਕਰ ਲੈਂਦਾ ਹੈ ਉਹਦੋਂ ਆਪਣੇ ਦੇਖ ਵੀ ਲੈਂਦਾ ਹੈ ਆਪਣੇ ਅੰਤਰ ਆਤਮ ਨੂੰ ਦੇਖਣ ਵੀ ਕਰ ਲੈਂਦਾ ਆਪਣੇ ਰੂਪ ਨੂੰ ਪਛਾਣ ਵੀ ਲੈਂਦਾ है। ਮਹੱਲਾ ਪੰਜਵਾਂ ਮੁਖ ਸੁਹਾਵੇ ਨਾਮ ਚੋ ਆਠ ਪਹਿਰ ਗੁਣ ਗਾਉ ਕੋਈ ਕੀ ਸਾਚ ਨੂੰ ਸੁਣ ਕੇ ਤੇ ਚੌ ਚੜੇ ਫੇਰ ਮੁਖੋਂ ਬੋਲਿਆ ਹੋਇਆ ਵੀ ਸੋਹਣਾ ਲੱਗਦਾ ਜਿਹਨੂੰ ਨਾਮ ਸੁਣ ਕੇ ਨਾ ਉਹ ਜਿਹਦੇ ਬਾਰੇ ਦੱਸੇ ਉਹ ਠੀਕ ਨਹੀਂ ਦੱਸਦਾ ਜਾਣ ਬੁੱਝ ਕੇ ਵੀ ਤੋੜ ਮਰੋਲ ਉਹਦੇ ਸਭ ਛੇਰੀ ਉਹ ਨਾ ਹੱਠ ਪੈਰ ਗੋੜਦਾ ਅੱਠ ਪੈਰ ਗੋੜ ਤੇ ਬੜੀ ਚਾਉ ਰਾਮ ਨਾਨਕ ਦਰਗਾਹ ਬੰਦੀ ਹੈ ਦਰਗਾਹ ਚੋਂ ਦੀ ਜਿਹੜੀ ਗੁਣ ਗਾਇਨ ਦਰਗਾਹ ਚ ਪ੍ਰਵਾਨ ਵੀ ਹੁੰਦਾ ਜੇ ਗੁਣ ਗਾਇਆ ਦਰਗਾਹ ਚ ਪ੍ਰਵਾਨ ਹੋਵੇ ਕੋੜ ਦਾ ਫਾਇਦਾ ਵੀ ਕੀ ਹੋਇਆ ਜੇ ਗੱਲ ਕਹੀ ਸਰਕਾਰ ਚ ਪ੍ਰਮਾਣ ਨਾ ਹੋਵੇ ਆਪਣੀ ਮੰਨਦਾ ਬੰਦੇ ਇਹਦਾ ਫਾਇਦਾ ਵੀ ਬਿਲੀ ਨਾ ਥਾਵੇ ਥਾਵੇ ਨੂੰ ਜਦ ਗੱਲ ਬੰਦੀ ਗਈ ਹਾਂ ਠੀਕ ਹੈ ਸੁਪਨੇ ਚ ਬੜਾਏ ਕਿ ਜਿਸ ਜੇ ਮੁਖ ਤਖਸਾ ਰੰਗੂ ਜੇ ਸੁਪਨੇ ਚ ਬੜਾਉਂਦੇ ਤੇ ਨਿਕਲ ਗਈ ਕਿ ਕਿਹਾ ਥਾਵੇ ਨੂੰ ਥੋਬ ਰਿਹਾ ਦਰਗਾਹ ਸੀਟ ਪੱਕੀ ਹੋ ਗਈ ਹਾਂ ਜੀ ਬਾਹਰ ਵੇਖ ਨਾ ਪਾਈਐ ਪ੍ਰਭ ਜਾਮੀ ਇੱਕ ਇਸ ਹਰ ਜਿਉ ਬਾਹਰੀ ਸਭ ਫਿਰੇ ਨਿਕਾਮੀ ਬਾਹਰ ਬੈਠੀ ਬਾਹਰ ਜਿਹੜਾ ਸਰੀਰ ਦੇ ਦੇਖਣੇ ਦੇ ਨਾਲ ਨਹੀਂ ਪ੍ਰਾਪਤੀ ਹੋ ਸਕਦੀ ਪ੍ਰਭ ਜਾਮੀ ਇਹ ਅੰਦਰ ਬੈਠਾ ਦਿਲੀਆਂ ਜਾਣਨ ਵਾਲਾ ਹੈ ਬਾਹਰਲੇ ਪੇਖਣਾ ਕੰਮ ਨਹੀਂ ਜੋ ਵੀ ਅਸੀਂ ਕਾਰ ਕਰਦੇ ਹਾਂ ਇਹ ਹਰ ਪ੍ਰਭ ਦੇ ਮਿਲਣ ਵਾਲੀ ਕਾਰ ਉਹ ਹੈ ਨਹੀਂ ਕਿ ਹਰ ਪ੍ਰਭ ਦਾ ਪ੍ਰੇਮ ਉਹਦੇ ਨਾਲ ਪੈਦਾ ਹੁੰਦਾ ਨਹੀਂ ਹਰ ਤੋਂ ਬਾਹਰੀ ਹੈ ਹਰ ਦਾ ਉਹਦੇ ਨਾਲ ਕੋਈ ਲੈਣ ਦੇਣ ਨਹੀਂ ਉਹ ਕਾਰ ਦੇ ਨਾਲ ਜੋ ਅਸੀਂ ਕਰਦੇ ਹਾਂ ਜਾਂ ਭਗਤੀ ਕਰਦੇ ਹਾਂ ਸਭ ਫਿਰੇ ਨਿਕੰਮੀ ਨਿਕੰਮੀ ਉਹ ਸਭ ਕੁਝ ਨਕਮ ਹੈ ਜਿਹੜਾ ਅਸੀਂ ਹਲ ਨੂੰ ਛੱਡ ਕੇ ਧਰਮ ਦੇ ਕਰਮ ਕਰਦੇ ਹਾਂ ਜਿਹਦਾ ਵਿੱਚ ਹਰ ਦਾ ਕੋਈ ਵੀ ਜਲਵਾਲ ਵਲੀ ਕਿਸੇ ਤਰੀਕੇ ਨਾਲ ਪਰ ਅਸੀਂ ਕਰ ਰਹੇ ਹਾਂ ਧਰਮ ਦੇ ਇਹ ਕੰਮ ਉਹ ਨਕਮ ਉਹਨ ਕੋਈ ਫਾਇਦੀ ਨਹੀਂ ਲੱਗਣਾ ਠੀਕ ਹੈ ਜੀ ਵਰਕਾਸ ਤੇਰੇ ਕਿਤੇ ਨਾ ਕੰਮ ਹੈ ਜੀ ਹਾਂ ਜੀ ਮਨ ਰੱਤਾ ਕੁਟੰਬ ਸਿਉ ਨਿਤ ਗਰਭ ਫਿਰਾਮੀ ਫਿਰੈ ਗੁਮਾਨੀ ਜਗ ਮਹਿ ਫਿਰਦਾ ਰੋਜ ਫਿਰੈ ਗੁਮਾਨੀ ਜਗ ਮਹਿ ਕਿਆ ਗਰਭਹਿ ਦਾਬੀ ਪਾ ਗੁਮਾਨੀ ਕਾਰੀ ਲੋਗ ਕੋ ਕਾ ਜੈ ਫਿਰਦੇ ਨੇ ਜਿਵੇਂ ਕਿਸੇ ਨੂੰ ਪੈਸੇ ਦਾ ਹੰਕਾਰ ਕਿਸੇ ਨੂੰ ਗਿਆਨ ਦਾ ਹੰਕਾਰ। ਦામੀ ਦਮ ਦੌਨ ਪੈਸੇ ਦੇ। ਕਿਸੇ ਨੂੰ ਤਾਂ ਆਪਣੇ ਵਿੜਾਈ ਦਾ ਹੰਕਾਰ ਹੈ ਵੀ ਮੈਂ ਬੜਾ ਮੈਨੂੰ ਗੁਰੂ ਬਣ ਲਿਆ। ਬਹੁਤ ਬੜਾ ਡੇਰਾ ਮੇਰੇ ਕੋਲ ਬਹੁਤ ਬੜਾ ਪੈਸਾ ਆਹ ਹੰਕਾਰ ਇਹਦੇ ਵਿੱਚ ਤੁਰੇ ਫਿਰਦੇ ਨੇ। ਕਿਸੇ ਰਸੇ ਤੁਰੇ ਫਿਰਦੇ ਨੇ। ਠੀਕ ਹੈ ਜੀ। ਆਪਣੇ ਦਮੜਿਆਂ ਦਾ ਮਾਣ ਹੋ ਗਿਆ ਪੈਸਾ ਜੜ ਜੜ ਵਸਤੂ ਦਾ ਅਮਾਨ ਕਰ ਬੈਠੇ ਜਿਹੜਾ ਸੀ ਉਹ ਵੀ ਜੜੇ ਆ ਹਾਂਜੀ ਚਲਦਿਆਂ ਨਾਲ ਨਾ ਚੱਲਈ ਮੈਂ ਹਰ ਜੀ ਹੁਕਾਮੀ ਹੁਣ ਜਦੋਂ ਜੋਤ ਨੇ ਜਾਣਾ ਜਦ ਚੀਜ਼ ਨੂੰ ਢੋਲੀ ਨਾਲ ਜਾਂਦਾ ਸਰੀਰ ਬਣੀ ਨਾਲ ਤਾਂ ਜਾਂਦਾ ਚਲਦਿਆਂ ਨਾਲ ਨਾ ਚੱਲੀ ਖਿੰ ਜਾਏ ਬਿਲਾਮੀ ਜਦੇ ਦੂਰ ਹੋ ਜਾਣਾ ਅਲੱਗ ਹੋ ਜਾਣਾ ਜੋਤ ਨੇ ਮਾਇਆ ਤੋਂ ਵਿਚਰਦੇ ਫਿਰੇ ਸੰਸਾਰ ਕਿ ਸੰਸਾਰ ਦੇ ਵਿੱਚ ਆ ਵਿਚਰਦੇ ਨੇ ਸਨੇ ਸਰੀਰ ਮਾਇਆ ਦੇ ਵਿੱਚ ਵਿਚਰਦੇ ਨੇ ਹਰ ਜੀ ਉਹ ਕੰਮ ਉਹ ਆਪਣੀ ਮਰਜ਼ੀ ਨਾਲ ਸਮਝਦੇ ਫਿਰਦੇ ਆ ਦੂਏ ਬੁਲਕੇ ਫਿਰਦੇ ਉਹ ਬਸ ਤੇ ਅਸੀਂ ਆਪਣੀ ਮੰਦੀ ਤੋਂ ਫਿਰਦੇ ਨੂੰ ਅੱਛਾ ਜੀ ਇਹ ਜਿਹੜੇ ਵਿਚਰਦੇ ਫਿਰੇ ਸੰਸਾਰ ਮੈਂ ਹੁਕਾਮੀ ਇਹ ਮਨਮੁਖ ਹਾਂ ਮਨਮੁਖੇ ਨੇ ਫਿਰਦੇ ਹੁਕਮ ਜੀ ਨਾਲ ਵੀ नहीं। <laughs> नहीं नहीं। कर्म कर्म पर ਮੰਗਦੇ ਗਦੋ ਨੇ ਕੋਈ ਨਹੀਂ ਬੋਲਦਾ ਜੀ ਕਰਮ ਖੁਲਾ खुला ਪਾਇਆ ਪਰ ਮਿਲਿਆ Swami ਜੋ ਜਨ ਹਰ ਕਾ ਸੇਵਕੋ ਹਰtis ਕੀ ਕਾਮੀ ਕਰਮ ਖੁਲਾ ਜਦੋਂ ਕਿਸਮਤ ਖੁੱਲ ਗਈ ਗੁਰ ਪਾਇਆ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਐਸਾ ਸਤੋਰ ਬਿੜਗੰਦਾ ਜਿਹਦੇ ਕੋਲੋ ਕੁਝ ਹੋਵੇ ਜਦੋਂ ਕੋ ਦੇ ਦਿੰਦਾ ਮਿਲ ਜਾਂਦਾ ਜਦ ਇਹ ਗੱਲ ਬਣਦੀ ਸਤਗੁਰ ਨੂੰ ਦੇਖੇ ਤੇ ਨਹੀਂ ਗੱਲ ਬਣਦੀ ਗਿਆਨ ਦੀ ਪ੍ਰਾਪਤੀ ਨਾਲ ਗੱਲ ਬਣਦੀ ਜੇ ਗਿਆਨ ਦੀ ਪ੍ਰਾਪਤੀ ਹੋ ਕੀ ਆ ਹਰ ਮਿਲਿਆ ਸੋਬੀ ਆ ਸੋਬੀ ਮਿਲ ਗਿਆ ਤੋੜ ਲਿਆ ਅੰਦਰੋਂ ਗੁਰੂ ਬਖੀਤ ਉੱਠੋ ਨੇ ਆਹ ਸੰਗਤ ਰਾਮ ਰਾਜ ਜੋ ਹਰ ਕੀ ਸੇਵਕੋ ਹਰ ਕਾ ਸੇਵਕੋ ਜਿਹੜਾ ਹਰ ਦਾ ਸੇਵਕ ਹੈ ਜਨ ਜੀਵ ਹਰ ਕਿਸ ਕੀ ਕੰਮੀ ਉਹਦੇ ਸਾਰੇ ਕਾਬੂ ਹਰ ਕਰਦਾ ਫਿਰ ਉਹਦੀ ਹਰ ਕਾਮਨਾ ਹਰੇ ਪੂਰੀ ਕਰਦਾ ਸਭੇ ਚਾਹ ਦੀਆਂ ਪੂਰੀਆਂ ਹਰ ਆਫ ਕਰਦਾ ਠੀਕ ਹੈ ਇਹ ਥਿਰਕਰ ਬੈਸੋ ਹੋ ਗਿਆ ਹੈ ਜੀ ਹਾਂ ਜੀ ਹਾਂ ਜੀ ਬੈਸੋ ਹਰ ਜਨ ਪਿਆਰੇ ਠੀਕ ਹੈ ਉੱਤੇ ਸਤਗੁਰ ਲਿਖਿਆ ਇੱਥੇ ਹਰ ਕਿਸ ਕੀ ਲਿਖਤਾ ਹੈ ਜੀ ਕੋਈ ਗੱਲ ਆ ਸਤਗੁਰ ਹਰ ਅੰਦਰ ਵਿੱਚ ਝੜਕਦਾ ਹੈ ਆਪਣੇ ਘਰ ਤੋਂ ਤਾਂ ਕੋਈ ਫਰਕ ਨਹੀਂ ਉਹਨਾਂ ਘਰ ਤੋਂ ਠੀਕ ਹੈ ਜੀ ਇੱਥੇ 14ਵੀਂ ਪੌੜੀ ਦੀ ਸਮਾਪਤੀ ਹੈ ਜੀ